ਹਲਤ ਪਾਤ ਦੂਏ ਦੇ ਸਵਾਰ RAM RAM ਅੰਤਰ ਉਰਤਾ ਹਲਤ ਪਾਤ ਦੋ ਲੋ ਸਵਾਰ ਆ ਲੋਕ ਵੀ ਸਵਾਰ ਲੋ ਹਲਤ ਹਲ ਦੋ ਲੋਕ ਆ ਜਿੱਤੇ ਹਿੱਲ ਜੱਲ ਬਾਇਆ ਡੋਲਣੀ ਹਿੱਲ ਜੁਲੋ ਹਲਤ ਹਲਤ ਵਾਲਪੁੱਤ ਵਾਲ ਤੋਂ ਆਇਆ ਹਲਤ ਪਾਤ ਦੂਏ ਦੇ ਹੋ ਸਵਾਰ ਇਹਦਾ ਡੋਲਦਾ ਮਨ ਦੋ ਜਵਾਬ ਲੋ ਦੋ ਜਨ ਲੋ ਖਾਇਦਾ ਮਤਲਬ ਹੈ ਪਦਰਤ ਵਿੱਚ ਵੀ ਨੁਕਸਾ ਹੈ ਉਹ ਉਹ ਜਹਾਂ ਹਲਤ ਪਲਤ ਤੋਂ ਹੋਇਲੋ ਧਵਾਰ ਤੇ ਤਰ ਮੈਂ ਮਤਲਬ ਜਿਹੜੇ ਸਭ ਤੋਂ ਦੂਜੇ ਗੱਲ ਦੇ ਪਦੋਂ ਦਾ ਕੀ ਸਵਾਲ ਹੋਣਾ ਜਿਹੜਿਆ ਬਈ ਸਾਡੇ ਕੰਦੇ ਉਹਦਾ ਕੀ ਹੈ ਸਮਾਲਣਾ ਦੋ ਤਾਂ ਉਹ ਤਾਂ ਫਿਰ ਭਗਾੜ ਦੇਣਗੇ ਬਿਲਕੁਝ ਹੋਰਦੀ ਨਾ ਮੈਂ ਉਸ ਮਾਲ ਤੋਂ ਦੋ ਹੋਰਦੀ ਤਾਂ ਉਸ ਮਾਲ ਤੋਂ ਯਾਰ ਗੁਰੂ ਜੀ ਤੇਰਾ ਨਾਮ ਆਸਮਾਨ ਦੰਗੇ ਹੱਦ ਬਸ ਆਪਣਾ ਹਿਰਦਾ ਜਣਾ ਕਿਸੇ ਵੀ ਛੜਾ ਗਿਆਨ ਤੇ ਨਹੀਂ ਯਾਰ ਦੋ ਮਨ ਹੀ ਦਾ ਉਹ ਹੰਸ ਵੀ ਜੋ ਪਰਮਾਨਸਰੀ ਹੈ ਅੰਤ ਸਾਰ ਉਹ ਜਹੋਂ ਤਾਂ ਹਉ ਬਚਾਇਆ ਹਉ ਮਿਜ ਗਿਆ ਖੋਪਿਜ ਘਟਿਆ ਹੋਂ ਉਹ ਉਹਨੂੰ ਵੀ ਸਮਾਰਨ ਪੂਰੇ ਸਭੰ ਨਾਲ ਹਲਤ ਪਲਤ ਦੌਰੇ ਲੈਓ ਸਵਾਰ ਰਾਮ ਨਾਮ ਅੰਤਰ ਉ르ਤਾ ਰਾਮ ਨਾਮ ਅੰਤਰ ਉ르ਤਾ ਰਾਮ ਨਾਮ ਅਸਤ ਉ르ਦੇ ਵਿਚ ਅੰਦਰ ਹਿਰਦੇ ਦੇ ਵਿਚ ਜਿੰਨੋ ਧਾਨ ਕਰੀ ਜਾਉਂਗੇ ਜੋ ਜੋ ਗੁਰਬਾਣੀ ਦੀ ਜਿਸ ਨੂੰ ਬਸੇ ਇਸ ਸਾਥ ਚ ਪਰਖਿਆ ਪੂਰੇ ਗੁਰ ਕੀ ਪੂਰੀ ਦੇਖਿਆ ਜਿਹੜਾ ਪੂਰਾ ਗਿਆਨਪਾਨ ਹੁੰਦਾ ਨਾ ਪੂਰਾ ਗੁਰੋਂ ਤਾਂ ਜਿਹਦਾ ਪੂਰਾ ਗਿਆਨ ਹੋਵੇ ਇੱਥੇ ਬੇਕਤੀ ਦੀ ਗੱਲਾਂ ਪੂਰਾ ਗੁਰ ਜਾਨੇ ਪੂਰੇ ਗੁਰ ਕੀ ਇਹਨੂੰ ਫਿਰ ਉਹਦੀ ਦਿੱਖਿਆ ਪੂਰੇ ਗਿਆਨਾਂ ਪੂਰੀ ਦਿੱਖਿਆ ਦਿੱਤੀ ਹੈ ਸਿੱਖਿਆ ਦਿੱਤੀ ਹੈ ਸਿੱਖਿਆ ਜੋ ਦੱਸਿਆ ਉਹਨੂੰ ਦੇਖਿਆ ਕਹਿੰਦੇ ਨੇ ਜੋ ਜੋ ਸੋਝੀ ਆ ਉਹ ਸਿੱਖਿਆ ਹੁੰਦੀ ਹੈ ਜਿਕੇ ਦਸੀ ਹੋਈ ਗੱਲ ਦੇਖਿਆ ਜੋ ਜ્ઞਾਨੋਂ ਸਿੱਖਿਆ ਪੂਰੇ ਗੁਰ ਕੀ ਪੂਰੀ ਦਿੱਖਿਆ ਪੂਰੇ ਗੁਰ ਗੱਲ ਪੂਰੀ ਹੁੰਦੀ ਆ ਕੁਝ ਕੋਈ ਕਮੀ ਨਹੀਂ ਹੁੰਦੀ ਆ ਜਿਸ ਮਨ ਬਸੇ ਜਿਸ ਮਨ ਬਸੇ ਤਿਸ ਸੱਚ ਪ੍ਰਿਖਿਆ ਜਿਹੜਾ ਜਿਹਦੇ ਮਨ ਵਿੱਚ ਵਸ ਜਾਣਾ ਪੂਰੀ ਦੇਖਿਆ ਉਹ ਦੀ ਸੱਚ ਦੀ ਪ੍ਰੀਖਿਆ ਲਈ ਜਾਂਦੀ ਹੈ ਬਾਕੀ ਸੱਚ ਦੀ ਪ੍ਰੀਖਿਆ 'ਚ ਬੈਠੇ ਨਹੀਂ ਸਕਦਾ ਕੋਈ ਜਿਸ ਮਨ ਬਸਰ ਇਹਨਾਂ ਸਾਖਲੀ ਪ੍ਰੀਖਿਆ ਦੇਣੀ ਆ ਨਾ ਉਹਨੂੰ ਕੁਆਲੀਫਾਈ ਕਰਨਾ ਪੈਂਦਾ ਬੰਨਾ ਹਮ ਕੁਆਲੀਫਾਈ ਕਰ ਦੇਣਾ ਪਹਿਲਾਂ ਪੁੱਛ ਫਿਰ ਉਹ ਪੈਂਦੇ ਨੇ ਕਹਾ ਉਹਨਾਂ 'ਚ ਕੁਐ ਉਹਨਾਂ 'ਚ ਕਾਬਲ ਹੋ ਸੱਚ ਪ੍ਰੀਖਿਆ ਉਹਦੀ ਹੁੰਦੀ ਆ ਸੱਚ ਦੀ ਪ੍ਰੀਖਿਆ ਗਾਉਂ ਜਿਹਨਾਂ ਪੁੱਤਾਂ ਦੀ ਪ੍ਰੀਖਿਆ ਹੋਈ ਆ ਜਿਹਦੇ ਪੂਰੇ ਗੁਰ ਕੀ ਪੂਰੀ ਸਿੱਖਿਆ ਲਈ ਹੋਵੇ ਸੁਣੀ ਹੋਵੇ ਅਰਮਲੀ ਹੋਵੇ ਪੂਰੇ ਗੁਰ ਪੂਰੀ ਵਿੱਧਿਆ ਜਿਸ ਜਿਹਦੇ ਮਨ ਦੇ ਭਾਜਵੇ ਉਹਦੀ ਗਾਹ ਪ੍ਰੀਖਿਆ ਹੋਣੀ ਆ ਜਿਹਦੇ ਪੰਜ ਨਹੀਂ ਬੱਦਿਓ ਉਹ ਤਾਂ ਉਹਦੀ ਪ੍ਰੀਖਿਆ ਕੀ ਲੈਣੀ ਉਹੀ ਪ੍ਰਖਾ ਦੀ ਲੋੜ ਕੀਆ ਜਿਹਦੇ ਮਨ ਨਹੀਂ ਵਸੀ ਜਿਹਨੇ ਸਿੱਖਿਆ ਲਈ ਹੋਈ ਨਹੀਂ ਹੈ ਉਹੀ ਪ੍ਰਖਾ ਲਾਂ ਨਹੀਂ ਲੋੜ ਕੀਆ ਉਹੀ ਕੋਈ ਪ੍ਰਖਾ ਨਹੀਂ ਲੈਣਾ ਮਨ ਤਾਂ ਨਾਮ ਜਪੋ ਲੈ ਬਲਾਏ ਦਰਦ ਮਨ ਤੇ ਪਹੁੰਚ ਨਾਮ ਜਪੋ ਲੈ ਬਲਾਏ ਕਰਕੇ ਕੰਮ ਕਰਕੇ ਇਸ ਕਰਕੇ ਮਨ ਤਾਂ ਕਰਕੇ ਨਾਮ ਜਪੋ ਇੱਕ ਵਾਰ ਮਾਣ ਆਏਗਾ ਕੱਲ ਜਿੱਤਿਆ ਪਿਛਲਾ ਤਾਂ ਤਾਂਤਾ ਉਹ ਹੀ ਹੈ ਜਿਸ ਤੋਂ ਮਨ ਪੈਦਾ ਹੋਇਆ ਹੋਇਆ ਹੈ ਮਨ ਅੰਗੇ ਆਉਦਾ ਬਾਣੋਸੀ ਤਾਂ ਵੀ ਕਹਿ ਸਕਦੇ ਸਾਡੇ ਤਾਂਤਾ ਅੰਗ ਹੈ ਵਾ ਸਰੀਰ ਰਹੂਗਾ ਜੇ ਬਾ ਵਡਣੀ ਜਾਂਦੀ ਹੈ ਕਈ ਵਾਰ ਮੇਰਾ ਬਾਹਾਂ ਤੋਂ ਬੱਚ ਵੀ ਪੈਦਾ ਹੋ ਜਾਂਦਾ ਨੇ ਕਬਲੋਂ ਵਹਾਂ ਆ ਰਹੇ ਛੋਟੇ ਛੋਟੀਆਂ ਬਹਾਂ ਆਲੇ ਇਫੈਕਟ ਸਰੀਰ ਅੱਜ ਦੀ ਜੇ ਬਹੁਤੀ ਸਾਰੀ ਬਹੁਤੀ ਚੋਗ ਪੈਦਾ ਹੋਏ ਨੇ ਅੰਤ ਹੈ ਸਰੀਰ ਦਾ ਅੰਗ ਇਸ ਕਰਕੇ ਮਨ ਸਰੀਰ ਦਾ ਅੰਗ ਮਨ ਤਾਂ ਨਹੀਂ ਹੈ ਤਾਂ ਜਿੱਦਾਂ ਜਿੱਤ ਚੀਜ਼ ਪੈਦਾ ਹੋਈ ਐ ਬੂੜਾ ਜਣਾ ਬੂੜਾ ਤਾਂ ਹੁੰਦਾ ਦੇ ਵਿੱਚ ਬਾਗ ਪੈਦਾ ਹੁੰਦਾ ਹੈ ਉਰ ਦੇ ਵਿੱਚ ਬਹੁਤ ਫਰਿਆ ਚੀਜ਼ਾਂ ਪੈਦਾ ਹੁੰਦੀ ਹੈ। وہاں ਪਹਿਲਾਂ ਛੋਟੀਆਂ ਹੁੰਦੀਆਂ ਬੜੀਆਂ ਹੋ ਜਾਂਦੀਆਂ ਨੇ। ਮੋਰ ਦੀ ਤਾਂ ਜਿੰਦੜੀ ਹੈ ਨਾ ਜਿਹੜੀ ਸ਼ਕਤੀ ਹੈ ਸਾਰੀ ਇਹ। ਹਾਂਜੀ। ਕੋੰਤਾ ਨੂੰ ਨਾਮ ਜਪੋ। ਲਿਵ ਲਾਏ ਦੁੱਖ ਦਰਦ ਮਨ ਤੇ ਭੋਜਾਇ। ਇਸ ਕਰਕੇ ਚਿਤ ਕਰਕੇ আর মন ਕਰਕੇ ਮਨ ਜਿੱਤੇ ਕੋਗੇ ਜਪੋ ਇਕ ਵਾਰ ਹੋਏ ਕਿ ਚਿੱਤ ਲੈ ਲਾਇ ਪੂਰੇ ਤਾਮਲਾ ਕੇ ਦੁੱਖ ਦਰਦ ਮਨ ਤੇ ਭੋਜਾਏ ਦੁੱਖ ਦਰਦ ਭੈਜ ਮਨ ਤੋਂ ਦੂਰ ਹੋ ਜਾਂਦੀ ਜੇ ਤਾ ਕੋਈ ਕਰੇ ਲਈ ਤੇ ਕਰਕੇ ਦੇਖ ਲੋ ਜੇ ਜਿਵੇਂ ਕਹਾ ਕਰਕੇ ਦੇਖ ਲੋ ਜੇ ਰਸ ਨਹੀਂ ਆਉਂਦੇ ਫਿਰ ਦੱਸੋ ਸੱਚ ਸੱਚ ਵਪਾਰ ਕਰੋ ਵਪਾਰੀ ਦਰਗਾਹ ਨਿਵੇਖੇਬ ਤੁਮਾਰੀ ਮੇਰਾ ਬੰਦਾ ਲੋਕ ਜਾਂਦੇ ਸਾਰੇ ਹੀ ਦੇ ਕਿ ਜੱਟ ਇਹੀ ਆ ਜਾਣਗੇ ਜੇ ਕਰੀਏ ਉਹ ਕਰੇ ਤਾਂ ਫਰਦੇ ਹੀ ਕੋਈ ਪਤਾ ਸਭ ਨੂੰ ਰਿਜਲ ਆਉਣਗੇ ਪਰ ਕੋਈ ਜ਼ਿੰਦਾਰ ਨਹੀਂ ਹੈ ਸਿੱਖੀ ਚਾਹੀਦੀ ਜੀ ਕਿ ਚਾਹੀਦੀ ਉਹ ਕਰਦਾ ਹਾਂ ਕਰੋ ਵਪਾਰੀ ਨਾਮ ਜਪੋ ਲੈ ਬੁਲਾਏ ਦਰਦ ਗੁਸਤੇ ਇਹ ਦੁਖਦਦਕ ਔਰ ਭੈ ਤੁਤੋ ਚਲੇ ਜਾਣਗੇ ਜੇ ਕੋਈ ਲਵਲਾ ਕੇ ਮਨਬਾਣੀ ਦੇ ਨੂੰ ਸਮਝੇ ਔਰ ਉਤੇ ਚੱਲੇ ਬਸਾਵੇ ਨੂੰ ਸੱਚ ਵਪਾਰ ਕਰੋ ਵਪਾਰੀ ਨਰਗੇ ਸੱਚ ਵਪਾਰ ਕਰੋ ਵਪਾਰੀ ਸੱਚ ਦਾ ਵਪਾਰ ਕਰੋ ਜੇ ਵਪਾਰੀ ਬਣਨਾ ਹੀ ਹੈ ਔਰ ਵਪਾਰੀ ਜੇ ਵਪਾਰੀ ਬਣਨੇ ਨਬਾੜੀ ਹੋਣਾ ਚਾਹੁੰਦੇ ਆ ਤਾਂ ਸੱਚ ਦਾ ਵਪਾਰ ਕਰੋ ਜੂੜਦਾ ਦਾ ਦਾਸ ਕਰਦੇ ਹੀ ਨਾ ਸੰਤ ਸੱਚ ਦਾ ਨੇ ਕਿ ਨਹੀਂ ਕਰਦੇ ਹੁਣ ਆਪਣਾ ਆਪਣਾ ਦੇਖ ਲੋ ਦਰਗਾਹ ਨਾ ਕਿਬ ਤੁਹਾਡੀ ਤਾਕੇ ਜਿਹੜੀ ਤੁਹਾਡਾ ਸੌਦਾ ਨਾ ਇਹ ਦਰਗਾਹ ਜੀ ਪ੍ਰਮਾਣ ਹੋ ਜਵੇ ਕਿਸੇ ਦਾ ਵੀ ਸੌਦਾ ਪ੍ਰਮਾਣ ਨਹੀਂ ਹੈ ਦਰਗਾਹ ਦੇ ਵਿੱਚ ਚਲੇ ਸੰਤ ਕੋਲ ਦਰਗਾਹ ਜੀ ਕਿਸੇ ਦੀ ਖੇਪ ਖੇਪਦਾ ਹੈ ਦਰਗਾਹ ਦੇ ਵਿੱਚ ਆ ਗੁਰਬਾਣੀ ਵਾਲੀ ਖੇਪ ਦਰਗਾਹ ਦੇ ਹੋਈ ਹੈ ਇਹਨਾਂ ਮਿਲਾ ਲਓ ਉਹ ਸੰਪਰਦਾ ਸਾਡੇ ਕੋਲ ਆ ਸਾਡੇ ਕੋਲ ਹੈ ਕੁਰਬਾਨੀ ਇਹਦੇ ਨਾਮ ਨਾਲੋ ਐਜਾ ਜਿਹੜਾ ਇੱਥੇ ਮੁਬਾਰਕ ਕੀਤਾ ਹੋਇਆ ਨਾ ਇਹਨੇ ਦੱਸਿਆ ਹੋਇਆ ਇਹਦੀ ਖੇਪ ਦਰਗਾਹ ਹੈ ਜਦ ਨਾਲ ਹੁੰਦਾ ਪ੍ਰਮਾਨ ਹੈ ਦਰਗਾਹ ਦੇ ਵਿੱਚ ਜਿਹਦੀ ਹੈ ਇਹ ਰੱਦ ਨਹੀਂ ਕੀਤਾ ਜਾ ਸਕਦਾ ਇਹ ਨੂੰ ਰੱਦੀ ਦੀ ਤੋਂ ਖਲੀ ਜਿੱ ਨਹੀਂ ਜਾਂਦੀ ਇਹ ਤੇ ਪਰਮਾਨਾ ਜੀਆ ਕਹਿੰਦੇ ਹਾਂ ਚਲੋ ਤੇ ਵੀ ਤਾਂ ਮਾੜਾ ਮੋਟਾ ਕਮੀ ਹੋਵੇ ਨਾ ਮਾੜੀ ਮਾੜੀ ਚਾਲ ਮਾੜੀ ਕੋਈ ਨਹੀਂ ਰੁਕਲਾਂਗੇ ਜਿਵੇਂ ਮਾੜੇ ਕਦੇ ਸ਼ਲੋਕਾਂ ਦੀ ਕਮੀਆਂ ਫਿਰ ਕੱਢ ਕੇ ਰਹਾ ਕਰ ਲੈ ਮਾੜੀ ਮੋਟੀ ਨਹੀਂ ਕਮੀ ਆਉ ਤਾਂ ਕਹਿੰਦੇ ਨੇ ਬਸ ਹੈ ਪਰ ਜ਼ਿਆਦਾ ਕਮ ਨਹੀਂ ਦੀ ਛੋਟੀ ਮੋਟੀ ਗਲਤੀ ਛੋਟੀ ਮੋਟੀ ਗਲਤੀ ਹੋਵੇ ਕੋਈ ਹਵਾਸਮਾਨ ਚਾਂਸ हां दो एक दो नंबर सा वो भूल जाते नहीं ग्रेष ग्रेष ग्रेष जल्दी चल जाता है इतना चल जाता है ज्यादा नहीं होता थोड़ी बहुत आना को लम तो सबको भूल गुरु करता दो एंगल भूल की थी माफ नहीं होती होज में भूल होज में भूल ਰਾਮ ਗੋਡੇ ਦੀ ਬੋਲ ਨਹੀਂ ਫਾਪ ਹੁੰਦੀ ਜੇ ਜਾ ਕੇ ਹੀ ਤੇ ਉਹ ਫੈਦੀ ਉਹ ਵੀ ਦੇਖ ਲੈਂਦਾ ਨਾ ਕਿਵੇਂ ਹੋਈ ਹੋਈ ਇਹ ਨਹੀਂ ਦਾ ਮੰਨਦਾ ਜਿੰਨਾ ਵੀ ਤੁਹਾਡੇ ਕੋਲ ਸੌਦਾ ਲੈ ਕੇ ਜਲਿਆ ਉਹ ਫੁੱਦੀ ਹੋ ਸਾਰੀ ਜਿੰਨਾ ਗਿਆਨ ਤੁਹਾਡੇ ਕੋਲ ਹੈ ਤੇ ਕੁਝ ਕਿਤੇ ਥੋੜੀ ਤੇ ਕਮੀ ਹੋ ਗਈ ਉਹ ਗਲਤੀ ਹੋ ਗਈ ਉਹ ਤਾਂ ਚਲੋ ਨਭ ਜਾਂਦੀ ਹੈ ਰੇ ਥੋੜੇ ਬੋਤੇ ਹੈ ਬੁੱਧਰ ਦੇ ਵੀ ਵਸੇ ਗੁਰਕਾਵਨ ਮੰਨਨੇ ਸੀ ਜਿਹੜੀ ਹੈ ਗੁਰਕਾਵਨ ਤਾਂ 20 ਮਿੰਟ ਸਹੀ ਮੰਨਦਾ ਹੋਵੇ ਕਿਤੇ ਕੋਈ ਚੂਖ ਹੋ ਜਵੇ ਥੋੜੀ ਬਹੁਤ ਉਹ ਆਪ ਹੀ ਹੋ ਜਾਂਦੀ ਸੱਚ ਵਪਾਰ ਕਰੋ ਵਪਾਰੀ ਦਰਗਾਹ ਦੇਵੇਂ ਖੇਮਤੁ ਮਾਰੀ ਦਰਗਾਹ ਦੇਵੇਂ ਖੇਮ ਸੱਚ ਵਪਾਰ ਕਰੋਗੇ ਖੇਮ ਦਰਗਾਹ ਜੁਬਜਾਤੀ ਇੱਕ ਆ ਟੇਕ ਰੱਖੋ ਮਨ ਨਾਨਕ ਬਹੁ ਆਵੇ ਜਨ ਇੱਕ ਟੇਕ ਰੱਖੋ ਮਨ ਤੇ ਇੱਕ ਇੱਕ ਰੱਖੋ ਤੇ ਇੱਕ ਇੱਕ ਰੱਖੋ ਜੇ ਤਰ ਆਵੇ ਜਾਣੀ ਇਹ ਕਦੇ ਨੀ ਤਰ ਕੁੜੀ ਨੂੰ ਬਣਾਉਣਾ ਤੇ ਕਦੇ ਵੀ ਮਾਇਆ ਨੂੰ ਨਹੀਂ ਬਣਾਉਣਾ ਸੱਚ ਨੂੰ ਢੇਕ ਬਣਾਓ ਜੇ ਇੱਕ ਢੇਕ ਆ ਸੱਚ ਦੀ ਹੈ ਇੱਕ ਢੇਕ ਆ ਤਾਂ ਦੀ ਹੈ ਤੇ ਦੋ ਢੇਕਾਂ ਹੈ ਫਿਰ ਨਾ ਝੂਠ ਹੋ ਸੱਚੀ ਢੇਕ ਫਿਰ ਝੂਠ ਦਾ ਵੀ ਸਾਰਾ ਹੈ ਮਾਇਆ ਦਾ ਸਾਰਾ ਲੈਣ ਦੀ ਲੋੜ ਨਹੀਂ ਹੈ ਢੇਕ ਦੇ ਵਿੱਚ ਬਾਲਾ ਜੀ ਮਾਇਆ ਦਾ ਮੇਰਾ ਸਾਰਾ ਜੀ ਲੋੜ ਨਹੀਂ ਨਾ ਇਹ ਸਾਰਾ ਛੱਡਣਾ ਹੀ ਪਊਗਾ ਜੇ ਮਾਇਆ ਦਾ ਵੀ ਸਾਰਾ ਬਾਨਲਾ ਵੀ ਛੱਡਿਆ ਜੇ ਮਾੜੀ ਮੋਢੀ ਲਿਆਈ ਰਹੀ ਵਿਵੇਸ਼ਕਾ ਸੱਕ ਨਹੀਂ ਆ ਰਿਹਾ ਕਿਤੇ ਕਦੋਂ ਹੋਊਗੀ ਕਿਤੇ ਕਦੋਂ ਹੋਊਗੀ ਕਿਤੇ ਗੱਤ ਨਹੀਂ ਨਾ ਨਹੀਂ ਨਾ ਕੋਈ ਵੈਰੀਆ ਨਾ ਬਹੂਗਾ ਨਾ ਇਹ ਬਗਾਨਾ ਹੈ जितै तो फिर अपना भी, अपना तो भी उट नहीं है कोई अपना तपराया भी है ओटे एक भी देखा दो होगियां थे अपना पराया दो टेकाऊंगी वेरी गुड ना दो टेकाऊंगी चाथा रख जाओ ता फिक्र है तो दो टेकाऊंगी जब मन मौन का फिक्र है दो टेकाऊंगी इक को रख दो दिन एक आ देख रखो मन बाहे नानक बहो आवे जाए ਤੋ ਬੋਰਾਵਾਂ ਜਾਣ ਖਤਮਾਂ ਦੇ ਨਾਨਕ ਬੋਰਾ ਨਾ ਆਵੇ ਜਾਣ ਦੁਬਾਰਾ ਜਨਮ ਕਿਉਂ ਹੋਊ ਨਾ ਟੇਕ ਇੱਕਾਏ ਸਿਰ ਗੁਰਬਾਨੀ ਤੇ ਟੇਕ ਐ ਮਾਇਆ ਤੇ ਟੇਕ ਨਹੀਂ ਗੁਰੂ ਤੇ ਟੇਕ ਰੱਖੋ ਗੋਲਕ ਤੇ ਨਾ ਰੱਖੋ ਸਿੱਧੀ ਉਹ ਗੱਲ ਗੁਰੂ ਤੇ ਟੇਕ ਨਾ ਰੱਖੋ ਕੋ ਕਰਾਂ ਗੋਲਕ ਤੇ ਤੇ ਛੱਡਾ ਤੇ ਗੁਰੂ ਵੀ ਛੱਡਾਂਗੇ ਸਰਦਾ ਉਹਨਾਂ ਦਾ ਗੁਰੂ ਤੇ ਰੱਖੇ ਤੋਂ ਸਦਾ ਸੰਸਾਰੀਆਂ ਦਾ ਗੋਲ ਕੁੱਤੀ ਤੇ ਇੱਕ ਬਿਨਾ ਨਹੀਂ ਸਕਦਾ ਮੇਰਾ ਦਾ ਗੁਰੂ ਦੀ ਤੇ ਇੱਕ ਬਿਨਾ ਨਹੀਂ ਸਕਦਾ ਉਹਨਾਂ ਨੇ ਗੋਲ ਕੁੱਤੀ ਤੇ ਇੱਕ ਰਖੜੀਆਂ ਉਹਨਾਂ ਦੇ ਗੁਰੂ ਦੀ ਤੇ ਇੱਕ ਰਖੜੀਆਂ ਤੇ ਇੱਕ ਹੋ ਰਹਿਣੀ ਪਰ ਉਹ ਦੁੱਬਦਾ ਜਨੇ ਧੋਏ ਰੱਖਦੇ ਨੇ ਗੋਲਕ ਦੀ ਟੇਕ ਵਾਲੇ ਜੇ ਗੁਰੂ ਦੀ ਟੇਕ ਦੀ ਨਾਲ ਲੋੜ ਹੁੰਦੀ ਪ੍ਰਕਾਸ਼ ਨਹੀਂ ਸੀ ਕਰਦੇ ਉੱਥੇ ਉਹ ਗੁਰੂ ਦੀ ਟੇਕ ਆੜ ਵਿੱਚ ਗੋਲਕ ਦੀ ਟੇਕ ਆ ਸੀ ਗੁਰੂ ਜੀ ਦੇਖਦਾ ਤੇ ਗੁੰਦ ਨਹੀਂ ਹੋਇਆ ਆ ਉਹਨਾਂ ਦੀ ਛਾਤਰ ਕੀਤਾ ਹੋਇਆ ਪੰਡਤ ਨੇ ਸਿਖਾਇਆ ਪੰਡਤ ਜੀ ਨੇ ਸਿਖਾਇਆ ਲਈ ਹੋਇਆ ਦਿਖਾਵਾ ਗੁਰੂ ਜੀ ਦੇਖਦਾ ਸੱਚੀ ਦੀ ਦੇਖਦਾ ਛੇਟੂ ਅਸਲ ਤਾਂ ਇਹ ਹੋਉਂਦੀ ਦੀ ਦੇਖ ਝੂਠ ਦੀ ਮਾਇਆ ਦੀ ਮਾਇਆ ਦੀ ਦੇਖ ਮਦਦ ਨਾਲ ਮਾਇਆ ਦੀ ਸ਼ਕਤੀ ਨਾਲ ਸੱਚ ਨੂੰ ਸਟੈਂਡ ਕਰਨਾ ਚਾਹਣਾ ਹੈ ਮਨ ਉਹ ਮੁਕਾ ਉਹ ਸੱਚ ਨੂੰ ਕਿਸੇ ਸ਼ਕਤੀ ਦੀ ਲੋੜ ਹੈ ਉਹ ਸੱਚ ਦੀ ਸ਼ਕਤੀ ਕਰਕੇ ਤਾਂ ਲੋਕਾ ਨੂੰ ਭੁਲੇਖਾ ਪਾਉਣ ਕਰਕੇ ਤਾਂ ਸਾਡੇ ਕੋਲ ਬੋਲ ਕਉਂਦੀ ਆ ਜਿਨਨੇ ਪਤਾ ਲੱਗਿਆ ਨਾ ਕਿ ਸਾਡੇ ਕੋਲ ਸਾਦੀ ਤੇ ਨਹੀਂ ਬੋਲ ਕੇ ਨਾ ਉੱਠ ਜਾਣਾ ਜਿਵੇਂ ਮੋਸ਼ ਉੱਠ ਜਾਂਦਾ ਨਾ ਢਿੱਗੀ ਰੱਖਦੀ ਏ ਪਤਾ ਨੀ ਕਿੱਥੇ ਚਲੇ ਜਾਂਦਾ ਕਾਫੂਰ ਹੋ ਜਾਂਦਾ ਕਾਫੂਰ ਕਹਿੰਦਾ ਉੱਠ ਜਾ ਨਾ ਐਸਾ ਪੇ ਜਾਂਦੀ ਐ ਤੇ ਟੁੱਟੀ ਖੋਦ ਕੇ ਰੱਖਦੀ ਐ ਆ ਉੱਠ ਜਾਂਦੀ ਐ ਮਾਇਆ ਇਹ ਸਾਰਾ ਕਾਫੂਰ ਹੋ ਜਾਂਦਾ ਰੰਗ ਥੋੜਾ ਮਾਇਆ ਦਾ ਰੰਗ ਦਾ ਫੁੱਲ ਦਾ ਰੰਗ ਮੁੱਤ ਦਾ ਸੁਮਤ ਦਾ ਇਹਦਾ ਜਨ ਥੋੜੀ ਖਾਧੋ ਆਈ ਨਾ ਜੜਾਵਾ ਸ਼ਾਇਦ 2 ਸਾਲ ਜੇ ਹੋ ਜਵੇ ਉਹ ਇੰਨਾ ਖਦਮ ਹੋਣ ਜਾਣਾ ਇੰਨਾ ਘਟ ਜਾਣਾ ਕਿ ਲਾਵੇ ਤੁਸੀਂ ਆਵੇ ਭੱਜਣਾ ਥੋੜੇ ਖਰਚੇ ਦੀ ਪੂਰੇ ਹੋਣ ਖਰਚੇ ਜਿਆਦਾ ਬਣਾ ਲੈ ਪੂਰੇ ਨਹੀਂ ਹੋਣੇ